कर्मक रावण करने हार इसके हाथ कहां विचारो कहां विचार कहां विचार मेरा कर्मक रावण करने हार बनया फिरता है आप ये कर्मक रावण करने हार कहे मैं हटा फंस की तुम मैं पीछे कह रहा जबल जाने ਜੇ ਆਪਾਂ ਨੂੰ ਵੀ ਲੈ ਲਈਏ ਤਾਂ ਇਹ ਹਾਦਸੇ ਹੈ ਕਿ ਇੱਕ ਜਾਵਲਤਾ ਹੀ ਕਹਾ ਕਿ ਇਹ ਦੇ ਆ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਪ੍ਰਭ ਸੋਏ ਜੈਸੀ ਦ੍ਰਿਸ਼ਟੀ ਕਰੇ ਜਿਤਨੂ ਜੈ ਜੀ ਸੁਰਤ ਜਿਤਨੂ ਕਰੂਗਾ ਉਠੇ ਪਾਸੇ ਦੇ ਧਿਆਨ ਧਰੂਗਾ ਦ੍ਰਿਸ਼ਟੀ ਕੇ ਦੀਸੀ ਬੰਦੀ ਆ ਇਹ ਉਹ ਦਿਨ ਉਠੇ ਪਾਸੇ ਲਾਉਂਗਾ ਹੋਇਆ ਉਸਕੋ ਜੈ ਜੈਸੀ ਨਜ਼ਰ ਹੈ ਜੈਸੀ ਦ੍ਰਿਸ਼ਟੀ ਕਰੇ ਤੈਸਾ ਹੋਏ ਤੈਸਾ ਹੀ ਬਣ ਜਾਓ ਆਪੇ ਇਹ ਦ੍ਰਿਸ਼ਟੀ ਚ ਬੰਦਾ ਬਣ ਆ ਗਿਆ ਤਾਂ ਬੁੱਢਾ ਬਣ ਜਾਂਦਾ ਇਹ ਦ੍ਰਿਸ਼ਟੀ ਚ ਚ ਗਿਆਨੀਆਂ ਆਈਆਂ ਜੰਗਾ ਬਣ ਜਾਂਦਾ ਗੋਰੀਆਂ ਆਈਆਂ ਬਰੋਣ ਚਿੱਤੀ ਦਾ ਹਜ਼ੂਰ ਆਦ ਆਇਆ ਕਰ ਸਕਦਾ ਆ ਕਾਰਨ ਕਰਾਉਣ ਦਾ ਹਾਰੇ ਹੈ ਇਧਰਲੇ ਪਾਸੇ ਤਾਂ ਕਾਰਨ ਕਰਾਉਣ ਕਰਨੇ ਹਾਰੇ ਹੈ ਦੇ ਆਪਣਾ ਸਮਾਨ ਦਾ ਜਾਂ ਆਪਣਾ ਬਗਾੜ ਤੇ ਛੇਤਾ ਹੀ ਡਿਪੈਂਡ ਹਦਾ ਜਿਹੜਾ ਰਚਨਾ ਹੈ ਚੰਦ ਸੂਰਜ ਦੇ ਆ ਮਾਇਆ ਦੀਆਂ ਪ੍ਰਾਪਤੀਆਂ ਨੇ ਪਦਾਰਥਾਂ ਦੀਆਂ ਉਹਦੇ ਵਾਸਤੇ ਗੱਲ ਨਹੀਂ ਫਿਰ ਉਹਦੀ ਮਰਜ਼ੀ ਨਾਲ ਘੁੰਮੜਦੀ ਉਹਦੀ ਇਹਦੀ ਮਰਜ਼ੀ ਦੇ ਹਿਸਾਬ ਨਾਲ ਸਾਧੀਆਂ ਜੋ माया ਤੇ कब्जा ज्यादा नहीं होता कोई शरीर का तन माया जाएगी तो शरीर है तेरा नहीं माया से ताइकी लड़ना नहीं ये शरीर है तेरा नहीं कहता है माया रस पे तू कहता है इसमें ऐसे की करना कब कर ऐ थे ऐ तो गाइस हमको मान मान ਗੱਲਾਂ ਸਾਰੀਆਂ ਠੀਕ ਨੇ ਪਰ ਪਟਾਲਾ ਉਥੇ ਠੀਕ ਹੈ ਪਟਾਲਾ ਵੀ ਉਥੇ ਠੀਕ ਹੈ ਜੀਰ ਦੀ ਤਸਵੀਰ ਵੀ ਨਹੀਂ ਹੈ ਪਰ ਗੱਲਾਂ ਵੀ ਸਾਰੀਆਂ ਵਰਵਾਣੇ ਦੇ ਕਰਤਾ ਗਲਬੜ ਹੋ ਜੂ ਪੱਟਕੇ ਦੂਆ ਪਾਸੇ ਲਾਉਣ ਨੂੰ ਨਹੀਂ ਪਤਾ ਮੰਨੂ ਮਾਤਾ ਜੀ ਪਟਣਾ ਅਜੇ ਪਟਾਲਾ ਹੀ ਪੱਟਕੇ ਦੂਆ ਪਾਸੇ ਲਾਇਆ ਉਂਗਲ ਜਲਾਹ ਹੋ ਰਹੀ ਕਿ ਨਾ ਕੋਈ ਵਿਰੋਧ ਕਰਦਾ ਕੋਈ ਨਹੀਂ ਕਹਿਣਾ ਕਰਦਾ ਪਰ ਮੁਸ਼ਕਲ ਹੈ ਇੱਥੇ ਕਾਖੜੀ ਘਾਰ ਆ ਜਾਂਦੀ ਹੈ ਜੇ ਕਾਖੜੀ ਘਾਰ ਇਹ ਪੰਡਾਲਾ ਪਠਣਾ ਪੈਂਦਾ ਫਿਰ ਲੱਗਦਾ ਪਤਾ ਵੀ ਪੜਦਾ ਕਿ ਨਹੀਂ ਪੜਦਾ ਹੋਰ ਕਰਨਾ ਪੈਂਦਾ ਪਾਣੀ ਦੀ ਹਾਂ ਹਾਂ ਜੈਸੀ ਵੇਸ਼ ਕਰੇ ਤੈਸਾ ਹੋਏ ਆਪੇ ਆਪ ਪ੍ਰਭ ਸੋਏ ਇਹ ਆਪੇ ਆਪ ਪ੍ਰਵੇ ਜਿਹਨੂੰ ਪ੍ਰਭ ਕਹਦੇ ਆਪੇ ਹੈ ਪ੍ਰਭ ਆਪ ਆਪ ਆਪਣਾ ਨਖੋਟ ਹੈ ਕੈਸੀ ਦ੍ਰਿਸ਼ਟੀ ਦਾਦਾ ਹੋ ਜਾ ਅੰਦਰ ਆ ਕੇ ਚੱਲਦਾ ਬੇਈਮਾਨ ਲੋਕ ਕਹਿਣਗੇ ਵਰਮਾਨੇ ਜਦ ਬੇਈਮਾਨੀ ਅੰਦਰ ਹੈ ਤੇ ਇਮਾਨਦਾਰੀ ਉਹਨੇ ਜਿਸ ਨੇ ਹੋਈ ਜਾ ਵਹਾਂ ਜੇ ਤਾਂ ਬੇਰ ਨਾ ਪੜਨਾ ਚਾਹੁੰਦੇ ਨੇ ਤਾਂ ਘਟੀ ਹੋਈ ਜਾ ਬਾਰ ਇਹਨੇ ਇੱਥੇ ਇੰਨੀ ਕੁ ਬੇਈਮਾਨੀ ਜਾਈ ਦੀ ਭਾਈ ਸਾਹਿਬ ਇੱਕ ਇੱਕ ਉਹ ਜਾਤਾ ਫਿਰ ਵੀ ਬ੍ਰਹਮ ਉੱਠੇ ਦਾ ਚਾਹੀਦਾ ਹੈ ਸ੍ਰੀ ਚਰਨੋਂ ਮੜਾ ਆਪਣਾ ਲੈ ਲਿਆ ਸ੍ਰੀ ਗੰਗਦੁਰੂ ਸਿਉ ਨਾਦਾ ਸ੍ਰੀ ਤਾਂ ਗੰਗਦੁਰੂ ਸਿਉ ਨਾਦਾ ਵੀਣਾ ਦਾ ਇੰਤਾਨ ਦਾ ਤਰੀ ਪਰ ਆਹਨ ਸ੍ਰੀ ਗੁਰੂ ਗਿਆਨ ਰੋਕਾ ਦਿੰਦਾ ਤਾਂ ਨਾ ਗੁਰੂ ਕੋ ਮਨੇ ਅੰਦਰ ਤੋਂ ਬਾਤ ਗੁਰੂ ਨਹੀਂ ਕੋਈ ਮਨੇ ਸ੍ਰੀ ਨਾਮ ਨੂੰ ਆਖਦੇ ਜੇ ਕੋਈ ਬਾਤ ਗੁਰੂ ਮੰਨੇ ਤੇ ਵੀਣਾ ਦੇ ਕਲੇ ਸ੍ਰੀ ਦਾ ਅਨੁਗੂ ਕਰਦਾ ਪਰਾਂ ਮੰਨੇ ਸ੍ਰੀ ਜਨਨਾਰੇ ਹੁਦੀਮਨ ਤੇ ਆਪ ਸ੍ਰੀ ਜਨ ਤੇ ਗੜਾ ਮੰਨਦੇ ਨੇ ਵੀੜੇ ਜਿੰਗਰੇ ਕੁਣਕੜ ਮੰਨਦੇ ਵੀੜੇ ਸੀ ਪਸਾਂਦੇ ਸੀ ਤੇ ਉਹ ਮਤਫਕ ਨਹੀਂ ਹੋਏ ਰਾਜੀ ਹੋਏ ਵੀ ਨੂੰ ਗੁਰਿਆਈ ਦੇ ਕੇ ਕਿ ਨੇ ਠੀਕ ਉਹ ਕਹਿੰਦਾ ਦਿੱਤੀ ਹੋਈ ਨਹੀਂ ਨੂੰ ਗੁਰਿਆਈ ਨਾਂ ਇਹ ਉਹ ਤਾਂ ਕੋਈ ਲਖਣਾ ਨਹੀਂ ਸੀ ਜੈਸੀ ਦ੍ਰਿਸ਼ਤ ਕਰੇ ਤੈਸਾ ਹੋਏ ਆਪੇ ਆਪ ਉਪਰਮ ਸੋਏ ਜੈਸੀ ਦੇਖ ਲੇ ਤੈਸਾ ਹੋਏ ਜੈਸੀ ਆਪਣੇ ਦ੍ਰਿਸ਼ਟੀ ਜੈਸੀ ਇਹਦੀ ਬੁੱਧੀ ਚ ਸੋਚ ਹੁੰਦੀ ਹੈ ਜੇਸੀ ਇਹਦੀ ਆਪਣੀ ਸੋਚ ਹੁੰਦੀ ਹੈ ਉਹ ਹੋ ਬਣ ਜੁਦਾ ਸੋਚ ਭੜੀ ਹੈ ਭੜਾ ਬਣ ਜੁਦਾ ਸੋਚ ਚੰਗੀ ਹੈ ਤਾਂ ਚਾਹ ਬਣ ਜੁਦਾ ਆਪੇ ਆਪ ਉਪਰਮ ਸੋਏ ਇਸ ਕਰਕੇ ਆਪੇ ਫਿਰਬ ਸੋਚ ਤਾਂ ਮਾਲ ਆਪਣੀ ਦਾ ਆਪ ਅਜੋ ਜੋਰ hmm. कोई ਕੋਈ रहा ਸੋਚ ਬਦਲ ਨੂੰ ਜਿਬੂਰ ਕੌਣ ਕਰਦਾ ਹੈ ਲੋਭ ਕਰਦਾ ਹੋਊਗਾ ਉਹ ਕਰਦਾ ਹੋਊਗਾ ਖੋਪੇ ਕਰਦੀ ਹੋਊਗੀ ਸੋਚਦਾ ਤੇ ਕਰੋਧ ਕਰਦਾ ਹੋਊਗਾ ਦੁਨੀਆਂ ਦੀ ਵਿੜਿਆਈ ਦੀ ਇੱਛਾ ਕਰਦੀ ਹੋਊਗੀ ਇਹ ਸਾਰੇ ਓਗਲ ਜੇ ਮਰਦਾ ਓਕੜਾਂ ਦੇ ਓਕੜਾਂ ਹੈਗਾ ਨਹੀਂ ਜੱਗ ਤੇ ਜੇ ਫੇਰੇ ਐ ਕਰਦਾ ਤਾਂ ਓਕੜਾਂ ਦਾ ਰਾਜ ਹੈ ਤੇਰੇ ਤੇ ਗੁੜਾਂ ਦਾ ਰਾਜ ਹੈ ਹੀ ਨਹੀਂ ਰਾਜ ਗੁੜਾਂ ਦਾ ਹੋਊਗਾ ਓਕੜਾਂ ਦੇ ਰਾਜ ਆਲੇ ਸਾਰੇ ਤਾਂ ਵਰ ਬੂਟਾ ਉੱਤੇ ਹੁਣੇ ਹੁਣ ਤੱਕ ਜੋ ਕਿ ਸਪੀਕਰਸ ਨੂੰ ਆਪਣੇ ਰੰਗ ਜੋ ਕੁਝ ਕੀ ਨਾ ਜੋ ਆਪਣੇ ਰੰਗ ਸਭ ਤੋਂ ਦੂਰ ਸੋ ਉਹ ਕੁਝ ਕੀਤਾ ਆਪਣੇ ਰੰਗ ਵਿੱਚ ਕੀਤਾ ਕਾਹ ਪੜਾਏ ਨੇ ਆਪਣੀ ਬੱਚੀ ਨੂੰ ਪੜਾਇਆ ਦੇ ਜਟਾ ਨੇ ਆਪਣੀ ਬੱਚੀ ਨੂੰ ਦੇਖਿਆ ਉਹ ਜ਼ਬਰਦਸਤੀ ਲਗਾਤੀ ਨਜ਼ਰਾਂ ਲਗਾਤੀ ਆਪੇ ਸਾਰੀ ਦਿੱਦੋ ਸਾਧ ਤੈਨੂੰ ਗੁਰੂ ਮੰਨ ਸਾਰੇ ਦੇ ਚ ਤੇਰੀ ਵੱਡੇ ਵੱਡੇ ਲੋਕ ਸਾਰੇ ਪਿੱਛੇ ਪਿੱਛੇ ਗੁਰੂ ਵਰਤ ਖਲਦ ਗਏ ਦੁਨਿਆਵੀ ਵਿੜਾਈ ਦੀ ਚਾਹ ਦਿਖਾਤੀਆਂ ਤਾਨਾ ਕਨ ਦੁਨੀਆਂ ਦੇ ਬੜੀ ਆ ਅਭਿਸ਼ੇਕ ਕਰ। ਜੜੀ ਜਗ ਜਾਲਿਆ ਦਿੱਤਾ ਨਾਮ ਬਸਾਰ। ਇਸ ਬੜਾਈ ਨੇ ਨਾਮ ਬਸਾਰਿਆ। ਛੇ ਗੁਰਾਂ ਦੇ ਲਾਇਨ ਤੇ ਚੱਲੇਗਾ। ਸਾਡੇ ਨੂੰ ਗੁਰੂ ਢੀ ਬੋਲਦੇ ਗੁਰਾਂ ਕਾਲੀ ਲੈਂਡ ਤੇ ਛਡਾ ਦਿਓ। ਇਹਨੂੰ ਅਸੀਂ ਗੁਰੂ ਬਣਾ ਲੈਨੇ ਆ ਸਾਰੇ ਦੁਨੀਆਂ ਦੀ ਬੜਾਈ ਦੇਣੇ ਹੋਣੇ। ਛੋਟੇ ਜੇ ਬੱਚੇ ਨੂੰ ਇਹ ਦੇਖੀ ਦੁਨੀਆਂ ਦੀ ਬੜਾਈ ਕੁਝ ਵੀ ਨਹੀਂ ਰਾਜ ਕੀ ਹੀ ਦੁਨੀਆ ਦੀ ਵਿਡਿਆਈ ਦਾ ਦੁਨੀਆ ਦੀ ਇੱਜ਼ਤ ਦਾ ਟਕਰਾ ਕੀ ਨਾ ਗਏ ਟਕਰਾ ਕੇ ਪਰਮੇਸ਼ਰ ਤੋਂ ਪਰਮੇਸ਼ਰ ਨਾਲ ਟਾਲਾ ਦੇ ਉਹ ਜੋਗੀ ਸੀ ਉਹ ਨਾਸਨਾ ਦਾ ਜੋਗੀ ਵਟ ਵਟ ਪਾਏ ਫਿਰਦੇ ਸੀ ਜੋਗੀ ਕੋਈ ਗੱਲ ਦਾ ਜਵਾਬ ਤਾਂ ਦੇਣ ਅਸਰ ਪਾ ਜਾਣੇ ਫਿਰ ਤਾਂ ਇਹ ਕਾ ਜਟਾਣਾ ਸੀ ਇਜ਼ਤਾਰ ਹੂੰ ਕਿਉਂ ਕਿਹਾ ਸੀ ਸ੍ਰੀ ਚੰਦ ਕਰਕੇ ਕਿਹਾ ਜਦਿਆ ਨਾ ਬੜਨ ਕੌੜੇ ਸਾਹਿਬ ਤੋਂ ਤਾਂ ਕਿਹਾ ਸੀ ਕਿ ਤੁਸੀਂ ਨਾ ਕਿਹਾ ਸੌਰ ਸਾਹਿਬ ਰੱਖਣ ਲੱਗ ਹੋ ਤੁਹਾਡੇ ਨਾਲ ਖਾਦਾਂ ਇਹ ਜੱਟਾ ਮੇਰਾ ਰੱਖ ਲੈਂਦੇ ਜੇ ਨਾ ਦਸਨ ਦੀ ਬਾਣੀ ਹੋਵੇ ਜੱਟਾ ਨਾਲ ਖਾਦ ਤੇ ਲੋਕਾਂ ਨੇ ਵੀ ਨਹੀਂ ਤੇਰੇ ਜੱਟਾ ਸੰਖਰਨ ਅਰਥੀ ਬਰਦੇ ਜੱਟਾ ਆਓ ਆਪੁੱਤਰ ਕਾ ਸਵਾਰ ਹੂੰ ਸੌਰ ਨੂੰ ਪੜਾਈ ਪੜਾਉਣੀ ਹੈ ਤੁਸੀਂ ਆੜ ਰਹੇ ਹੋ ਦੋਿਆਂ ਦਾ ਕੋਈਤਬਾਲ ਦੀ ਔਰ ਕਿਸੇ ਦਾ ਕੋਈ ਦੁਆਰ ਨਹੀਂ ਦਰੁਖਾਲ ਸਾਖ ਸਾਖ ਨਾਲ ਬੰਨੂ ਕੋ ਹਾਂ ਹਦਰਾ ਪਾਸਾ ਦਾ ਜਿਧਾ ਨਕੂ ਪੱਕੀ ਜਖਾਣਾ ਕੋਈ ਕੋਈ ਜਖਾਣਾ ਜਰੀਦ ਨਹੀਂ ਆਕਿ ਹਾਂ ਗੁਰ ਸਤਗੁਰ ਦਾ ਜੋ ਸਿੱਖ ਹੈ ਆਖਾਊਗਾ ਕੋਈ ਨਹੀਂ ਜੋ ਕੋਈ ਫੌਜ ਵਿੱਚ ਜੰਨੂ ਵੀ ਪਤੀ ਹੋ ਗਏ ਪਰ ਪਾਵੇ ਅਮਰ ਹੋ ਨਾ ਵੀ ਲਵੇ ਉਪਰਤ ਸੱਗੇ ਨਾਮਮਰਤ ਪੌਣ ਆਲਵਿਜ ਕੋਈ ਨਹੀਂ ਉਹ ਜਦਵ ਦੀ ਰੱਖੂਗਾ ਉਤਰੋ ਜੋ ਕਿਸੇ ਨੋ ਸੋ ਆਪਣੇ ਰੰਗ ਸਭ ਤੇ ਦੂਰ ਸਭੂ ਕੇ ਜੋ ਕਿਸੇ ਨਾਲ ਆਪਣੇ ਜੋ ਉਸ ਕੀਤਾ ਆਪਣੇ ਮੌਜ ਆਪਣੇ ਗਿਆਨ ਨਾਲ ਕੀਤਾ ਰੰਗ ਗਿਆਨ ਹੈ ਅੰਤ ਮਰਜੀ ਨਾਲ ਕੀਤਾ ਆਪਣੀ ਮਰਜੀ ਆਪਣਾ ਰੱਖ ਲੈ ਸਭੂ ਦੇ ਦੂਰ ਸਭੂ ਦੇ ਸਮੇ ਉਹ ਤਾਂ ਸਾਰਿਆਂ ਦੇ ਦੂਰ ਹੈ ਉਹ ਤਾਂ ਸਰਬਵਿਆਪੀ ਹੈ ਤੇ ਸਰਬਵਿਆਪੀ ਹੈ ਜੋ ਚੀਜ਼ ਸਰਬਵਿਆਪੀ ਸਾਰਿਆਂ ਨਾਲ ਜੁੜਦੀ ਹੈ ਜੁੜੀ ਹੋਈ ਆਕਾਸ਼ ਚੀਜ਼ ਨਹੀਂ ਹੈ ਦੱਸੋ ਕੋਈ ਆਕਾਸ਼ ਖਾਲੀ ਨਹੀਂ ਦੇ ਵਿੱਚ ਤਾਂ ਆਕਾਸ਼ ਦੇ ਵਿੱਚ ਹੀ ਉਹ ਵਿੱਚ ਆਕਾਸ਼ ਸਾਰਾ ਉਹਦਾ ਨੋ ਵੀ ਹੈ ਜੱਬਰ ਫੀਰੇ ਮਾਇਆ ਜਦ ਕਿੱਥੇ ਹੁੰਦੀ ਹੈ ਜੇ ਸੁਣ ਤੋਂ ਸਮਝ ਲਗਾਉਂਦਾ ਮਾਇਆ ਕਿੱਥੇ ਕੀ ਹੈ ਮਾਇਆ ਸਿਰਫ ਅੰਬਰ ਰੂਪ ਹੁੰਦਾ ਹੋਰ ਕੁਝ ਨਹੀਂ ਹੁੰਦੀ ਔਰ ਕਿਥਾਰੇ ਅੰਬਰ ਜਲੀਨ ਹੋ ਜਾਂਦੀ ਹੈ ਮਾਇਆ ਫਿਰ ਅੰਬਰ ਜਿਹਾ ਬਾਹਰ ਹੁੰਦੀ ਹੈ ਹਵਾ ਪਵਨ ਐਵੇਂ ਪਵਨ ਜਾ ਕੇ ਧਰਤੀ 'ਤੇ ਖ ਜਾਂਦੀ ਹੈ ਪਵਨ ਜਦ ਖੜ ਜਾਂਦੀ ਹੈ ਹਵਾ ਜਦ ਜੀਦੀਏ ਕੇ ਤੁਕਾ ਜੀ ਤੇ ਅਬਾ ਦੇਖੀਏ ਹਵਾ ਨਹੀਂ ਦੀਦੀ ਆਵਾਜ਼ ਆਵੇ ਢੋਲਣੇ ਕਰਕੇ ਹੀ ਪਤਾ ਲੱਗਦਾ ਸਾਨੂੰ ਚੱਲਦੀ ਕਰਕੇ ਜਦੋਂ ਹੁੰਦੀ ਹੈ ਜਦ ਹਵਾ ਰੁਕ ਜਾਂਦੀ ਹੈ ਕਹਿੰਦੇ ਹਵਾ ਮਰ ਗਈ ਉਹ ਗੁੱਟ ਸੋਈ ਹੁੰਦੀ ਹੈ ਸਮਝ ਹਵਾ ਨਹੀਂ ਵਗਾ ਕਿਤੇ ਹਮ ਹੋ ਹੈ ਇਹ ਤਾਂ ਹਮ ਸਮਝ ਜਾਂਦੀ ਹੈ ਗੁੱਤੇ ਹੁਣਾਂ ਪਤ ਕੀ ਦੂਜੇ ਹਵਾ ਬਣ ਜਾਂਦਾ ਹੋਣ ਰੂਪ ਹੋਏ ਜਾਵਾਂਗੇ ਇਹ ਤਰੀਕੇ ਨਾਲ ਸਾਰੇ ਕੋ ਸਮਝੋ ਦੂਜੇ ਦੇਖੇ ਕਰੇ ਵਿਵੇਕ ਆਪੇ ਏਕ ਆਪੇ ਅਨੇਕ ਦੂਜੇ ਦੇਖੇ ਕਰੇ ਵਿਵੇਕ ਏਕ ਆਪੇ ਏਕ ਅਨੇਕ ਜਦ 부ਝਦਾ ਜਦ ਦੇਖਦਾ ਉਹਨੂੰ ਦਰਸ਼ਨ ਕਰਨਾ ਹੈ 부ਝੀ ਹੋਈ ਜੀ ਦਰਸ਼ਨੂ 부ਝੇ ਦਾ ਬਾ ਦੇਖੇ 부ਝਣਾ ਇਹ ਦੇਖਣਾ ਕਰੇ ਬੁਝ ਜੋ 부ਝਣ ਜੋ ਦੇਖਿਆ ਨਾ 부ਝ ਕੇ ਦੇਖਿਆ ਦਰਸ਼ਨ ਹੋਇਆ 부ਝ ਕੇ 부ਝੇ ਦੇਖੇ ਕਰੇ ਬਵੇਕ ਫੇਰ ਬਵੇਕ ਦੀ ਗੱਲ ਕਰ ਸਕਦਾ ਉਹ ਤੋਂ ਪਹਿਲਾਂ ਬਵੇਕ ਦੀ ਗੱਲ ਨਹੀਂ ਕਰ ਸਕਦਾ ਆੜਕ ਗੁਰੂ ਨੂੰ ਦੇਖ ਦਿਖਾਏ ਦਿਖਾਊਗਾ ਤਾਂ ਬੋਲਣਾ ਪਊਗਾ ਦੱਸਣਾ ਪਊਗਾ ਜੋ ਦੇਖਿਆ ਉਹ ਲੋ ਕੁਝ ਕਹਿ ਦੇਖਿਆ ਉਹ ਹੀ ਦੱਸਣਾ ਇਹਦਾ ਸੁਣਾਇਆ ਦਿਖਾਉਣਾ ਕੁਝ ਦੇਖੇ ਕਰੇ ਬिवेਕ ਕਰੇ ਬिवेਕ ਆਪੇ ਆਪੇ ਅਨੇਕ ਆਪੇ ਇੱਕ ਆਪੇ ਠੀਕ ਅਪੇ ਇੱਕ ਹੈ ਉਹ ਅਪੇ ਅਨੇਕ ਸੱਚਖਣ ਦੇ ਵਿੱਚ ਅਨੇਕ ਨੇ ਹੁਕਮ ਹੈ ਤਾਂ ਸਭ ਤੋਂ ਸ਼ਬਦ ਰੂਪ ਜਿੱਤ ਨੇ ਵਿਵੇਕ ਕਰਨੇ ਵੇਲੇ ਵਿਵੇਕ ਕੌਣ ਕਰੇ ਤ੍ਰਸਤੀ ਕਰਨੇ ਕਿ ਲਈ ਇਹ ਵਿਵੇਕ ਹੈ ਦੇਖ ਕੇ ਸੰਸਾਰ ਨੂੰ ਦੇਖਦੇ ਹੋਏ ਸਾਰਿਆਂ ਨੂੰ ਸਾਰਿਆਂ ਨੂੰ ਦੇਖਦੇ ਧਿਆਨ ਚ ਰੱਖਦੇ ਹੋਏ ਸਾਡੀ ਸ੍ਰਿਸ਼ਟੀ ਨੂੰ ਤਾਂ ਹੀ ਰਬੇ ਦਾ ਅਗਿਆਰ ਕਰ ਰਹੇ ਹੁਕਮ ਜੋ ਜੋ ਹੁਕਮ ਚੱਲੇ ਹੋ ਰਿਹਾ ਹੈ ਸਾਡਾ ਕਾਦੇ ਵਾਸਤੇ ਹੋ ਰਿਹਾ ਹੈ ਸ੍ਰਿਸ਼ਟੀ ਵਾਸਤੇ ਸ੍ਰਿਸ਼ਟੀ ਦੇ ਲੋੜਾਂ ਵਾਸਤੇ ਸ੍ਰਿਸ਼ਟੀ ਦੇ ਭਲੇ ਵਾਸਤੇ ਜੀ ਵਾਸਤੇ ਤੁਖ ਜੇਕਰ ਆਪਣੇ ਮਨ ਦੀ ਗੱਲ ਦੱਸਣ ਤੋਂ ਪਹਿਲਾਂ ਜਿਹੜੇ ਜਾਣਨ ਨੂੰ ਉਜਣਾ ਚਾਹਣੇ ਨੇ ਫਿਰ ਬੋਲਿਆ ਸਭ ਕੋ ਜਾਣਦਾ ਜਿਹੜਾ ਬਿਰ ਬੋਲਿਆ ਸਭ ਕੋ ਜਾਣਦਾ ਉਹ 부ਝਣ ਦੀ ਸ਼ਕਤੀ ਰਹੀ ਉਹ ਮੇਰੇ ਗੱਲ ਦੀ ਦਿਲ ਦੀ ਗੱਲ 부ਝ ਨਹੀਂ ਕੋਈ ਨਹੀਂ ਜਿਹੜੀ ਦਿਲ ਦੀ ਗੱਲ ਹੈ ਜਿਹੜੀ ਮਨ ਵਿੱਚ ਗੱਲ ਸੀ ਬੋਲੀ ਨਹੀਂ ਸੀ ਜਾ ਸਕਦੀ ਬੋਲੀ ਵੀ ਜੇ ਬੋਲੀ ਨਹੀਂ ਜਾਂਦੀ ਦਸ ਲਿਖੀ ਵੀ ਨਹੀਂ ਸੀ ਜਾ ਸਕਦੀ ਪਰ ਉਹਨੂੰ ਇਸ ਤਰੀਕੇ ਨਾਲ ਬੋਲਦਾ ਰਿਹਾ ਇਸ ਤਰੀਕੇ ਨਾਲ ਬੋਲਦਾ ਰਿਹਾ ਕਿ বুਝੀ ਜਾ ਸਕਦੀ ਕਿਉਂਕਿ ਐਸੀ ਹੋਰ ਚੀਜ਼ ਤਾਂ ਕੋਈ ਹੈ ਨਹੀਂ ਜੈਸਾ ਉਹ ਹੈ ਤਸਲਫ ਹੈ ਨਾ ਕੋਈ ਬੋਲੀ ਸਿੱਧੀ ਗੱਲ ਦੱਸਣੀ ਹੋਈ ਐਸ ਤਰੀਕੇ ਨਾਲ ਗੱਲ ਦੱਸੀ ਜਾ ਐਸ ਤਰੀਕੇ ਨਾਲ ਤਰੀਕੇ ਨਾਲ ਗੱਲ ਦੱਸੀ ਜਾ ਕਿ ਬੁੱਝੀ ਜਾ ਸਕਦੀ ਹੈ ਬੁਝਾ ਸਕਦੀ ਹੈ ਬੁਝਾਰ ਬਹੁਤ بڑی ਵਿਸਾਰੇ ਬੁਝਾਰ ਦਾ ਇਹਨੇ ਤਰੀਕੇ ਨਾਲ ਕਰਤਾ ਕਿ ਬੁੱਝੀ ਜਾ ਸਕਦੀ ਹੈ ਹੱਥਾਂ ਨੂੰ ਕਰ ਕਹਿਣ ਲੱਗੇ ਆਈ ਨਹੀਂ ਸਮਝ ਹੋਇਆ ਸ਼ਬਦ ਬੇਦੇ ਦੀ ਜਾਣਿਆ ਸੀ ਸ਼ਬਦਾਂ ਦਾ ਫੱਕੇ ਦੀ ਜਾਣਿਆ ਪਹਿਲਾਂ ਚੱਲਣਾ ਨੂੰ ਕਹਿਣ ਲੱਗੇ ਬਾਅਦ ਕਰ ਚਿਤਪੰਤੀ ਵਿਝਾਇਆ ਸਾਧੂਆ ਕਹਿਣ ਲੱਗੇ ਉਹ ਗਾਂ ਦੀ ਗੱਲ ਦਾ ਕੀ ਬੁਝੜੀ ਤੇ ਇਹ ਸਾਨੂੰ ਭਾਸ਼ਾ ਦਾ ਕਹਿਣ ਨਹੀਂ ਆ ਜਿਹੜੀ ਭਾਸ਼ਾ ਦੀ ਗੁਆਣੀ ਵੀ ਕਿਉਂਦਾ ਹੀ ਕਹਿਣ ਜੇ ਭਾਸ਼ਾ ਦਾ ਗਿਆਨ ਵੀ ਪੂਰਾ ਹੋਵੇ ਫਿਰ ਵੀ ਗੱਲ ਬੁੱਝਣ ਵਾਲੀ ਹੈ ਜੇ ਭਾਸ਼ਾ ਦਾ ਗਿਆਨ ਵੀ ਪੂਰਾ ਹੋਵੇ ਕੋਲ ਪੜਾਵੀ ਤੇ ਹੀ ਭਾਸ਼ਾਰ ਬਣੀ ਹੋਕੀ ਫਿਰ ਵੀ ਗੱਲ ਬੁੱਝਣ ਵਾਲੀ ਹੈ ਭਾਈ ਦੇਖੇ ਕਰੇ ਵਿਵੇਗ ਆਪੇ ਏਕ ਅਪੇ ਅਨੇਕ ਜਿਹੜਾ ਬੁੱਝ ਕੇ ਦੇਖ ਲੈਣ ਦਰਸ਼ਨ ਕਰ ਲੈਣ ਫਿਰ ਉਹ ਬਿਵੇਕ ਉਹ ਜੋ ਗਿਆਨ ਕਰਾਉਂਦਾ ਆ ਕਰਦਾ ਉਹ ਬਿਵੇਕ ਕਹਿੰਦੇ ਨੇ। ਇਹ ਉਹਦੇ ਅੰਦਰ ਬਿਵੇਕ ਹੁੰਦਾ। ਜਦੋਂ ਬੁੱਝ ਕੇ ਦੇਖਦਾ। ਉਹ ਹੀ ਬਿਵੇਕ ਹੈ ਉਹਦੇ ਅੰਦਰ। ਦੇਖ ਲੈਣਦਾ ਨਾ ਕੱਲ ਨੂੰ ਬੁੱਝ ਲੈਣਦਾ ਗੁਰਬਾਣੀ ਵੀ ਜਿਹੜਾ ਲਿਖਣ ਵਾਲਾ ਰਾਈਟਰ ਦੀ ਭਾਵਨਾ ਕੀ ਸੀ ਕੀ ਕਹਿਣਾ ਚਾਹੁੰਦਾ ਸੀ ਇਹ ਬੁੱਝਣਾ। ਉਹ ਵੀ ਬਿਵੇਕ ਹੈ ਇਹ ਵੀ ਬਿਵੇਕ ਹੈ ਸਰ। ਜੇ ਜਾਣਿਆ ਸੋ ਤੇ ਸੀ ਜੇੜਾ ਪੁੱਜ ਕੇ ਦੱਸਦੇ ਉਹ ਵਿਵੇਕ ਹੁੰਦਾ ਕਰੇ ਤੁਰੇ ਦੇਖਣ ਦਾ ਕੰਮ ਕਰਦਾ ਹੈ ਪੁੱਜਣ ਦੇਖਣ ਦੀ ਪ੍ਰਿਆ ਕਰਦਾ ਉਹ ਵਿਵੇਕ ਹੁੰਦਾ ਵਿਵੇਕ ਹੀ ਆ ਬਸ ਆਪੇ ਇੱਕ ਆਪੇ ਦੇਖੀ ਪ੍ਰਕਿਰਿਆ ਉਹ ਹੀ ਹੈ ਸਾਧ ਘਰ ਕਿਹਾ ਨਹੀਂ ਕਿ ਉਹ ਇੱਥੇ ਹੈ ਉਹਨਾਂ ਚਾਰ ਦੇ ਵਿਧੇ ਨੇ ਇੱਕ ਉਸੇ ਪਾਰ ਹੋਣਾ ਹੈ ਉਹ ਪਾਰ ਬ੍ਰਹਮ ਦਾ ਦਰ ਪਾਰ ਬ੍ਰਹਮ ਦੀ ਦੀ ਗੱਲ ਹੈ ਗੱਲ ਆਨੇਕ ਦੀ ਜੇ ਜੇ ਇਹ ਕਹਣਾ ਜਿਹੜਾ ਸ਼ਬਦ ਦੇ ਵਿੱਚ ਸ਼ਬਦ ਦੇ ਰੂਪ ਚ ਦੇਖਾ ਫਿਰ ਐਂ ਕਹਣਾ ਹਕਮ ਦੇ ਰੂਪ ਚ ਦੇਖਾ ਹਾਕਮ ਦੇ ਰੂਪ ਚ ਦੇਖ ਅਨੇਕਾਂ ਹਾਕਮ ਤਾਂ ਕੋ ਹਕਮ हुक्मारा हुक्म है कोई कठै पर के हुक्म अस्थायदा वो एक है हुक्म दे आगे एक का गुण है एक अनेक होते भी करा सब की तो बोल रहा है इच्छा एक है अनेक होते ਉਹ ਜਿਹੜਾ ਜਿਹੜਾ ਇੱਥੇ ਬੁੱਝ ਕੇ ਬੁੱਝ ਕੇ ਬੁਝਾ ਰਿਹਾ ਉਹ ਵਿੱਚ ਐਂਟਰ ਕਰ। ਅਨੇਕਤਾ ਚਲੇ ਜਾਂਦਾ। ਅਨੇਕਤਾ ਜੋ ਵੀ ਆਉਂਦੀ ਹੈ ਕਹਿੰਦਾ ਮਤਲਬ ਇਹ ਹੈ। 4 ਦਿਨਾਂ ਵੀ ਬੁੱਝਣ ਵਾਲੇ ਨੇ ਉਹ ਵਿੱਚ ਐਂਟਰੀ ਹੋ ਜੂ। ਚਾਹੇ ਉਹਨੇ ਇੱਕ ਲੱਖ ਦੇ ਨੇ ਤੂੰ। ਬਾਹਰ ਕਰਕੇ ਦੇਖ ਪਰੋਇ ਕੋਈ ਅੰਤਰੋਇ ਕਨੇ ਬਾਹੂ ਕੋਈ ਨਹੀਂ। ਬਾਰੋ ਅਨੇਕਲੇ ਅੰਦਰ ਹੋਇ ਤੇ। ਐ ਕਹ ਲੋ ਹਾਂਜੀ। ਮਰੇ ਨਾ ਬਿਨ ਸੇ ਆਵੇ ਨਾ ਜਾਏ। ਨਾਨਕ ਸਦ ਹੀ ਰਹਾ ਸਮਾਇ। ਸਦੋ ਤੋਂ ਇੱਕ ਇੱਕ ਅਵਸਥਾ ਹੁੰਦੀ ਹੈ। ਫਿਰ ਉਹ ਜਮਲਵੰ ਖਤਮ। ਬਰੇ ਨਾ ਬੰਚਾ ਆਵੇ ਨਾ ਜਾਏ। ਆਵੇ ਨਾ ਜਾਏ। ਨਾਨਕ ਸਦ ਹੀ ਰਹਾ ਸਮਾਇ। ਸਦ ਹੀ ਰਹਾ ਹੈ ਸਦਾ ਹੀ ਆਪਣੇ ਅੰਦਰੇ ਸਮਾਇ ਰਹਿਦਾ ਹੈ। ਆਪਣੇ ਆਪ ਨਾਲ ਜੁੜਿਆ ਰਹੋ। ਰਾਤੋਂ ਵਿਦੇਸ਼ੇ ਸਮਝੇ ਆਪ ਆਪੇ ਰਚਿਆ ਸੰਕੇ ਸਾਥ। ਆਪਣੇ ਆਪ ਜਿਵੇਂ ਰਚਿਆ ਇੱਥੇ ਨੂੰ ਫਿਰ ਇੱਕ ਹੋ ਰਹਿ ਗਿਆ। ਖੋਲ ਦੀਏ ਨੂੰ ਹੋਰ ਆ ਗਿਆ। ਆਪੇ ਰਚਿਆ ਸੰਕੇ ਸਾਥ ਆਪੋਂ ਵਿਦੇਸ਼ੇ ਸਮਝਿਆ। ਇਹ ਆਪੇ ਵਿਦੇਸ਼ੇ ਆ ਸਮਝੀ ਕਿਸ ਨਹੀਂ ਪੱਗ ਆ ਮਰੀਨਾ ਬਿਨਸੇ ਆਵੇ ਨਾ ਜਾਏ ਨਾਨਕ ਸਦ ਹੀ ਰਿਹਾ ਸਮਾਇ ਹੀ ਰਿਹਾ ਸਮਾਇ ਜਿਹੜਾ ਹੈਗਾ ਇਹ ਬਹੁਤ ਔਖੀ ਗੱਲ ਆ ਜੇ ਸੁਣਨ ਬਾਅਦ ਆ ਫਿਰ ਕਿੱਥੇ ਸਮਾਇਆ ਹੋਇਆ ਹੈ ਸੁਣਨ ਸਮਾਧ ਆ ਮਨ ਕਿੱਥੇ ਸਮਾਇਆ ਹੋਇਆ ਹੈ ਜਦੋਂ ਦੇਨ ਹੁਸਤਾ ਉਦੂ ਜੀ ਕਰਦੇ ਇਹ ਮਨ ਕਾਠਾ ਰਹਿ ਜਾਂਦਾ ਇਹ ਮਨ ਸੁਣ ਰਿਹਾ ਹੈ ਬੇਰਾਗੀ ਜਦੋਂ ਸ੍ਰਿਸ਼ਟੀ ਹੈ ਨਹੀਂ ਸੁਤਲ ਹੋ ਰਿਹਾ ਜਿਹੜਾ ਇਹ ਬੇਰਾਗੀ ਦੀ ਅਵਸਥਾ ਚਾਹੁੰਦੇ ਜਦ ਸ਼ਬਦ ਹੈ ਜਦ ਸਹਿਜ ਵਿੱਚ ਹੈ ਸੁਤਲ ਸਹਿਜ ਸ੍ਰਿਸ਼ਟੀ ਉਪਾਈ ਹੋਈ ਹੈ ਉਦੋਂ ਹੀ ਜੀ ਉਦੋਂ ਹੀ ਛੜ ਉੱਤਰ ਕਰਕੇ ਸ੍ਰਿਸ਼ਟੀ ਚਲਾ ਰਹੇ ਹੋ। ਉਹ ਹੀ ਤਾਂ ਛਾਉਂਦੀ ਪ੍ਰਮਾ ਬਾਣੀ। ਉਦੋਂ ਬਾਣਾ ਇੱਕਾ ਸਾਰਿਆਂ ਦਾ ਬਾਣੀ ਜਿਸਮਾਇਆ ਨੇ ਸਾਰੇ ਸਾਰਿਆਂ ਦੇ ਸਾਰਿਆਂ ਦੇ ਮਾਨ ਸੱਚ ਵਾਲਿਆਂ ਦੇ ਬਾਣੀ ਜਿਸਮਾਇਆ ਨੇ ਉਹਨਾਂ ਦੇ। ਉਹਨਾਂ ਦੇ ਮੰਦੀ ਵਸਾਈ ਹੈ। ਉਹ ਤਾਂ ਹੀ ਚਿੰਤਾ ਸਾਰਿਆਂ ਦੀ ਸਰਬ ਕੀ ਦਿੱਤਾ ਉਹ ਆ ਭਗਵੰਦੀ ਆਉ ਦਸਿਆ ਹੋ ਕਮਕੀਆ ਭਗਵਾਨ ਦਾ ਪਾਣਾ ਉਹ ਪਾਣਾ ਕੀ ਹੈ ਸਾਰੇ ਨੀਚ ਦਿੱਤਾ ਹੈ ਪਾਣਾ ਹੋਰ ਕੁਝ ਨਹੀਂ ਹੈਗਾ ਪਾਣਾ ਕੋਈ ਪਾਵਰ ਨਹੀਂ ਹੈ ਪਾਣਾ ਦਾ ਚਿੱਤ ਉਹ ਤਾਂ ਦੀ ਸ਼ਕਤੀ ਤਾਂ ਉਹਨਾਂ ਦੇ ਵਿੱਚ ਹੈਗੀ ਹੈ ਸ਼ਕਤੀ ਰੂਪ ਦਾ ਆਪੇ ਨੇ ਸ਼ਕਤੀ ਦਾ ਜੋਤ ਵਿੱਚ ਹੈ ਉਹ ਉਹਨਾਂ ਦੀ ਇੱਛਾ ਦੇ ਵਿੱਚ ਦੀ ਉਹ ਸ਼ਕਤੀ ਉਹ ਗੈਰਿਟਿਕ ਦੂਰ ਜਾ ਕੇ ਜੋ 14 ਨੇ ਹੋ ਜਾਂਦਾ ਹੈ ਜਿਵੇਂ ਮੈਗਨੇਟ 2 4 ਫੁੱਟ ਤੋਂ ਇੰਨੀ ਸ਼ਕਤੀ ਰੱਖਦਾ ਕਿ ਉਹ ਲੋਹਾ ਪਰੇ ਤੇ ਛੋਟਾ ਜਿਹਾ ਉਹ ਕਿੰਨੀ ਸ਼ਕਤੀ ਰੱਖ ਉਹਨਾਂ ਏਰੀਏ ਆਕਾਸ਼ ਦੇ ਵਿੱਚ ਦੀ ਸ਼ਕਤੀ ਕਮ ਕਰ ਜਿੱਦ ਨਾਲ ਅਗਨ ਨਾਲ ਤਿਆਰ ਲੋ ਇਹ ਵਿਚਾਲੇ 2 ਫੁੱਟ ਤੇ 1 ਫੁੱਟ ਦਾ ਫਾਸਲਾ ਹੈ ਉਥੇ ਤਾਂ ਨਹੀਂ ਸ਼ਕਿਓ ਕੰ ਕਰਦੀ ਹੈ ਕੱਚਦਾ ਹੈ ਲੋ ਇਹਦੇ ਨਾਲ ਉਹ ਜਗਣਾ ਹੈ ਮੈਂ ਜੇ ਉਹ ਸ਼ਕਤੀ ਐਵੇਂ ਹੋਣੀ ਸ਼ਕਤੀ ਕਉ ਉਹ ਤਾਂ ਸਾਡੇ ਨਾਲ ਟੱਚ ਹੈ ਪਰ ਅਸੀਂ ਉਹਦੇ ਨਾਲ ਟੱਚ ਆ ਉਹ ਉਡੋਕ ਸੱਚ ਬਹੁਤ ਸ਼ਕਤੀਆਂ ਦਾ ਮਗਰਜ਼ੀਆਂ ਨੇ ਸਾਡੇ ਸਾਹਮਣੇ ਦੋਨਾਂ ਵਿਚਾਲੇ ਫਾਸਲਾ ਹੈ ਉਹ ਤਾਂ ਕਿਹਾ ਅਸੀਂ ਉਹਦੇ ਬਾਹਰ ਤਾਂ ਜਾ ਹੀ ਨਹੀਂ ਸਕਦੇ ਆਪਸਾ ਕਰਦਾ ਸੁੱਖਾਂ ਦੇ ਵਿੱਚ ਆਊਟ ਆਫ ਟੱਚ ਕੇ ਬਲੋਗ ਐਸੀ ਅਸੀਂ ਤਾਂ ਉਹਦੇ ਸਪਰਸ਼ ਵਿੱਚ ਆ ਹਰ ਵਕਤ ਧਿਆਨ ਦੀ ਸਪਰਸ਼ਵਲ ਧਿਆਨ ਦੀ ਹੈ ਧਿਆਨ ਉਹ ਬਾਹਰ ਧਿਆਨ ਕੀ ਹੈ ਧਿਆਨ ਤਾਂ ਸੁਪਨਾ ਦੇਖ ਰਿਹਾ ਧਿਆਨ ਉਪਨਰ ਜਗੂ ਦਾ ਤਾਂ ਤੇ ਉੇ ਪਾਸੇ ਜਾਊਂਗਾ ਪਹਿਲਾਂ ਇਹਨਾਂ ਦਾ ਹਾਲੇ ਹਾਲ ਮੁਝ ਨਾਲੀਏ ਹਾਲੇ ਹਾਲ ਮੁਝ ਨਾਲੀਏ ਜਾਂ ਜਾਊਂਗਾ ਕੀ ਜਾਊਗਾ ਕਿਵੇਂ ਜਾਊਗਾ ਹਾਲੇ ਇੱਦਾਂ ਹੀ ਨਹੀਂ ਹੋਈ ਐ ਅਜਾ ਝਾਕੂ ਦਾ ਜੇ ਦੇਖ ਲੂਗਾ ਜਾਗਦੇ ਪਹਿਲਾਂ ਸੁਣੀ ਹੋਈ ਗੱਲ ਆ ਉਨੇ ਹੋਰ ਯਾ ਦੇਖੀ ਹੋਈ ਹੈਗਾ ਅੱਲਾਹ ਵਰਗੀ ਚਾਹ ਕੇ ਦੱਸੂਗਾ ਦੱਸੂਗਾ ਜਿੰਨੀ ਮਰਜੀ ਦੱਸੀ ਜਾਵੇ ਪਰ ਉਹ ਗੱਲ ਨਹੀਂ ਦੱਸੋਈ ਜਿਹੜੀ ਜਾਗ ਤੇ ਹੋੜੀ ਜਿੰਨੇ ਮਰਜੀ ਦੱਸੀ ਜਾਓ ਤੁਸੀਂ ਤੁਸੀਂ ਕਹਿੰਦੇ ਸ਼ਹਿਰ ਦੇ ਵਿੱਚ ਰਹਿੰਨੇ ਹਾਂ ਉਹਦਾ ਜੋ ਮਨ ਤੁਸੀਂ ਕਥਾ ਰੋਜ਼ ਕਰੀਏ ਉਹ ਜਿਹੜਾ ਸੁਣਦਾ ਉਹਦਾ ਅੱਖੇ ਆਪਣੇ हिसाब ਨਾਲ ਪੜਾਉਂਦਾ ਤੁਸੀਂ ਆਪਣੇ हिसाब ਨਾਲ ਦੱਸਦੇ ਜਦੋਂ ਤੁਹਾਡੇ ਸ਼ਹਿਰ ਜਾਓ ਕਿਹੜਾ ਮੋਜ਼ੀ ਨਾ ਖੇਦਾ ਕੋਈ ਨਹੀਂ ਪਹਿਲਾਂ ਉਹਦੇ ਆਪਣੇ ਤਾਲਾ ਆ ਨਾ ਅੱਛਾ ਐਦਾਂ ਹੀ ਸੁਣ ਕੇ ਜੋ ਅਸੀਂ ਸਮਝ ਰਿਹਾ ਸੀ ਸਾਡਾ ਆਪਣਾ ਤਾਲਾ ਬਣੀ ਕੋਣ ਜਦ ਆਪਣੇ ਅੰਦਰ ਉਹ ਸੋਚੀ ਆਪ ਦੇਖਣਾ ਆਪਣੀਆਂ ਅੱਖਾਂ ਅੰਦਰ ਹੀ ਖੁੱਲਣੀਆਂ ਉਦੋਂ ਕਾਦੋ ਪੂਰੀ ਸਮਝ ਆਉਦੀ ਏ ਆਹ ਕਹੋ ਜੰਮ ਦੇ ਜਿਹੜੇ ਪਰਦੇ ਨੇ ਦੂਰ ਹੋ ਜਾਂਦੇ ਸੁਣ ਕੇ ਸੁਣ ਕੇ ਦੇ ਪਰਦੇ ਤੱਕ ਘਟੇ ਜਾਂਦੇ ਨੇ ਜਿਹੜੇ ਨੂੰ ਆਈ ਪਰ ਆਖਰੀ ਪਰਦਾ ਫਿਰ ਆਪੇ ਫੇਰ ਹੀ ਖੁੱਟਾ ਹੁੰਦਾ ਆਖਰੀ ਪਰਦਾ ਫਿਰ ਗੁਰਪ੍ਰਸਾਦ ਪਰ ਖੁੱਟਣਾ ਹੁੰਦਾ ਆਖਰੀ ਪਰਦਾ ਖੁੱਟਦਾ ਗਿਆਨ فرم کے پردے سدھو بولے بولے محبت نہ پڑ دے بہت سارے پردے کھول سکتا پڑ دے سارے بچے نہ کلو اور ناز نہیں ہونا ہاس نہیں پڑ دے وہ کھلا ਮਰੇ ਨਾ ਬਿਨਸੇ ਆਵੇ ਨਾ ਜਾਏ ਮਰੇ ਨਾ ਬਿਨਸੇ ਆਵੇ ਨਾ ਜਾਏ ਨਾ ਕੋਈ ਸੁਧੀ ਰਿਹਾ ਸੋਈ ਨਾ ਆਏ ਵਰਦਾ ਨਾ ਫਿਰਸਾ ਉਹਨੇ ਜਾਤੈ ਫੇਰ ਜਾ